ਪੱਕੇ ਨੂੰ ਮਾਰਨ ਲੱਗੇ ਜੋ ਉਹ ਜੂਣਾ ਨਹੀਂ ਵਜਣੀਆਂ ਇਹ ਜੂਣਾ ਦੀ ਕੰਨ ਨਹੀਂ ਜੋ ਮੇਰੀ ਕੰਨ ਚ ਇਹ ਜੋ ਸਭ ਚੁੱਪ ਕਰ ਗਏ ਬੋਲਾ ਹੀ ਸਤਿਗੁਰਾਂ ਦਾ ਓਏ ਹੀ ਸਤਿਗੁਰਾਂ ਦੀ ਆ ਹੁਣੇ ਨੂੰ ਕੀ ਆ ਕੀ ਮਸਤਾਨੇ ਨੂੰ ਤੇ ਪਰ ਸੱਚੇ ਪਾਤਸ਼ਾਹ ਕਿਆ ਤੁਹਾਡੀਆਂ ਸੁਖਮਣੀਆਂ ਨਾਲੋਂ ਮਿਲ ਮੇਰੀਆਂ ਗਾਲਾਂ ਚੰਗੀਆਂ ਲੱਗਦੀਆਂ ਇਹ ਜ਼ਿੰਦਗੀ ਉਹ ਸ਼ਬਦ ਪੜਦੇ ਹੁੰਦਾ ਹੀ ਮੇਰੇ ਵਰਗਿਆਂ ਬੰਦਿਆਂ ਨੇ ਨਕਮੀਆਂ ਨੇ ਕੀ ਪੜ ਲਿਆ mamam jo jo hota hai mamam jo hota hai nahi nahi mamam jo hota hai ab khata nahi tumhara ਉਮੀਦ ਬਰਾਜਮਾਨ ਸੰਤ ਜੀ ਆਹੋ ਜਾ ਆਨੰਦ ਮਾਨ ਰਹਿ ਜੋ ਦੁਨੀਆਂ ਤੇ ਹੈ ਨਹੀਂ ਕਨਿ ਤੇਰੇ ਹੋ ਤਰੀ ਪਿਆਰੇ ਨੇ ਪਰਦੇਸੀ ਪਿਆਰ ਤੀਦ ਨੂੰ ਇੰਉਂ ਦੀ ਪ੍ਰੀਖਿਆ ਲਈ ਸੀ ਕਿ ਕੁਆਰੀ ਇੱਥੇ ਡੋਢੀ ਦੇ ਅੱਗੇ ਇੱਕ ਸਿੱਖ ਨੇ ਮਾਤਾ ਜੀਉਨਕੌਰ ਜੀ ਨੂੰ ਵਗਾ ਹੋ ਕੇ ਮੱਥਾ ਟੇਕਿਆ ਤੇ ਨਾਲੇ ਫਿਰ ਆਪਣੇ ਮਨ ਦਾ ਦੁੱਖ ਪ੍ਰਗਟ ਕੀਤਾ ਆਖਿਆ ਮਾਂ ਮੈਨੂੰ ਅਜੇ 3 ਦਿਨ ਹੋ ਗਏ ਨੇ ਤੇ ਭੁੱਖੇ ਤ੍ਰਿਆਏ ਨੂੰ ਮੈਂ ਬਾਹਰ ਪੈੜੀਆਂ 'ਚ ਬੈਠਾ ਮੈਨੂੰ ਇਹ ਚੌਂਕੀ ਵਾਲੇ ਗਾਂ ਨਹੀਂ ਆਉਣ ਦਿੰਦੇ ਮਾਂ ਮੈਂ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਆਇਆ ਸਤਿਗੁਰੂ ਹਰੀਪੂਮਾ ਲਾਜੀਆ ਮੈਨੂੰ ਇਹ ਛਪਾਈਏ ਇਹਦੇ ਲਾਗੇ ਨਹੀਂ ਆਉਣ ਦਿੰਦੇ ਡੋੜੀ ਦੇ ਨਾ ਮੇਰੀ ਪੇਸ਼ ਜਾਂਦੀ ਆ ਨਾ ਮੇਰਾ ਜੀਤ ਪਛਾਣ ਪਰਤਣ ਨੂੰ ਕਰਦਾ ਮਾਤਾ ਜੂਰ ਕੌਰ ਜੀ ਰੋਪ ਹੈ ਖਲਗੇ ਮੀਰਾ ਪੁੱਤੇ ਵੀ ਸਮਾਂ ਆਉਣਾ ਸੀ ਉੱਥੋਂ ਹੀ ਪਿਸ਼ਾ ਕੇ ਲਾਂਗਰੀ ਨੂੰ ਆਂਦੇ ਆ ਪਹਿਲੋਂ ਪ੍ਰਸ਼ਾਦੇ ਪਰਸੋਂ ਦਾ ਬਾਹਰ ਬੈਠਾ ਤੈਗੀਆਂ ਜੀ ਅਗਾ ਹੁਣ ਵਧਿਆਏ ਮੈਂ ਪਹਿਲਾਂ ਪ੍ਰਸ਼ਾਦਾ ਕੋਈ ਸ਼ਕਾ ਲਵਾਂ ਦੋ ਪ੍ਰਸ਼ਾਦੇ ਹੁਣ ਕਰਕੇ ਹੱਥ ਤੇ ਰੱਖੇ ਤੇ ਦਾੜਾ ਪਵਾਇਆ ਜਦੋਂ ਇਥੇ ਜੋੜੀ ਚਾਹੇ ਮਾਤਾ ਜੀ ਇਹਨੇ ਚਾਣੂਏ ਉਸ ਵਾਲਾ ਆ ਗਾ ਵਧ ਪਿਆ ਕੇ ਮੱਥਾ ਟੇਕਿਆ ਮਾਤਾ ਜੀ ਪ੍ਰਸ਼ਾਦੇ ਫੜਾਉਣ ਲੱਗੇ ਇਹਨੇ ਪੁੱਛ ਵਾਲੇ ਨੇ ਉਹਨੂੰ ਮਾਰਿਆ ਧੱਕਾ ਉਹ ਇੱਕ ਪਾਸੇ ਨੂੰ ਡਿੱਗ ਪਿਆ ਮਾਤਾ ਜੀ ਨੂੰ ਵੀ ਉਹ ਵੱਜ ਗਿਆ ਵਿਚਾਰਾ ਇੱਕ ਪਾਸੇ ਪ੍ਰਸ਼ਾਦੇ ਕਿਸੇ ਬੰਨੇ ਡਿੱਗ ਪਏ ਉਹ ਆਪ ਕਿਸੇ ਬੰਨੇ ਡਿੱਗ ਪਿਆ ਮਤਾ ਜੀ ਉਹ ਕੋਲ ਦੀ ਪਿੱਛੋਂ ਹਟ ਕੇ ਤੇ ਫਿਰ ਸਤਿਗੁਰੂ ਰਾਮ ਸੁਣਾ ਨਾਂ ਲੈ ਕੇ ਤਾਣਾ ਮਾਰਿਆ ਜੇ ਤੂੰ ਨਾ ਪਰਦੇਸ ਜਾਣੋ ਇਹਨਾਂ ਨਾਲੇ ਸਾਡੇ ਨਾਲ ਕਿਉਂ ਬਣਦੀ ਏ ਗਰੀਬ ਨੂੰ ਆਜ ਤੂੰ ਸਾਡੇ ਨਾਲ ਇਉਂ ਨਹੀਂ ਕਰ ਇਹ ਤੇਰੇਆਂ ਸਿੱਖਾਂ ਪੁੱਤਾਂ ਨਾਲ ਇਹ ਵੀ ਪ੍ਰੀਖਿਆ ਅੱਗੇ ਆਉਣ ਵਾਲੀ ਇਹ ਵਕਤ ਆਉਣਾ ਸੀ ਯਾਰ ਯਾਰ ਰੋਈ ਜਾਂਦੇ ਆ ਪਿਛਾਂ ਨੂੰ ਭਰਤ ਗਏ ਫਿਰ ਜਾ ਜਦੋਂ ਲੱਤਾਂ ਮਾਰੀਆਂ ਤੇ ਖਾ ਕੇ ਤੇ ਪਿਛਾਂ ਭਰਤ ਗਿਆ ਫਿਰ ਸਤਿਗੁਰੂ ਹਰੀ ਸਿੰਘ ਜੀ ਕੋਲ ਜਾ ਕੇ ਤਰਲਾ ਪਾਇਆ ਗਰੀਬ ਲੋਹਾਜ ਦੁੱਖ ਵੇਖਿਆ ਨਹੀਂ ਜਾਂਦਾ ਜਰਿਆ ਨਹੀਂ ਜਾਂਦਾ ਇੱਕ ਸਿੱਖ दो ਤਿੰਨ ਦਿਨਾਂ ਦਾ ਭੁੱਖਾ ਧਰਿਆ ਬਾਹਰ ਬੈਠਾ ਸੀ ਪੈ ਗਿਆ ਜੀ ਉਹਨੂੰ ਪ੍ਰਸ਼ਾਦੇ ਦੇਣ ਲੱਗਿਆ ਸੰਤਰੀ ਨੇ ਲੱਤ ਮਾਰ ਕੇ ਪਰੇ ਸੁੱਟਾ ਹੈ ਪ੍ਰਸ਼ਾਦੇ ਨਹੀਂ ਲੈਣਤੇ ਇਹ ਸਾਡਾ ਦੁੱਖ ਕਦੋਂ ਕੱਟੂ ਸਾਈਬ ਬਸ ਸਤਿਗੁਰੂ ਰਵੀ ਸਿੰਘ ਮਹਾਰਾਜੀ ਉਹ ਸੀ ਜਿਹੜੇ ਤੁਰੇ-ਤੁਰੇ ਸਤਿਗੁਰੂਵਰੀ ਸੰਗ ਜੀ ਵਿਰਾਗੀ ਹੋ ਗਏ ਨੇ ਤੇ ਫਿਰ ਮਾਨਵਤਾ ਨੇ ਜੇ ਤੁਸੀਂ ਨਾ ਵੱਡੇ ਪ੍ਰਤਾਪ ਵਾਲੇ ਆਪਣੀਆਂ ਹਾਨੀਆਂ ਨਾਲ ਕੋਈ ਵਜਨ ਬਲਾਸ ਕਰ ਰਹੇ ਸੀ ਕੋਠੇ ਦੇ ਉੱਤੇ ਖਲੋਤਿਆਂ ਤੇ ਵਾਲਦਾਰ ਨੇ ਮਾਤਾ ਜੀ ਨੂੰ ਆਖਿਆ ਸਤਿਗੁਰਾਂ ਦਾ ਨਾਮ ਲਿੱਕੇ ਸਾਨੂੰ ਪਤਾ ਆ ਇਹ ਰਾਜਦਾਨ ਲਾਉਂਦਾ ਆ ਸਾਨੂੰ ਪਤਾ ਹੈ ਇਕੱਠੇ ਕਰਕੇ ਕੋਈ ਸਲਾਹ ਮਜਬਰੇ ਕਰਦੇ ਆ ਅਸੀਂ ਮਤਾਜੀ ਅੱਜ ਰਿਪੋਰਟ ਦੇ ਦੇਣੀ ਆ ਲੁਧਿਆਣੇ ਮਤਾਜੀ ਨੂੰ ਕੋਰਜੀ ਜਾ ਕੇ ਸਤਗੁਰੂ ਪ੍ਰਤਾਪ ਸਿੰਘ ਜੀ ਨੂੰ ਆਖਿਆ ਉਹ ਇਹਨਾਂ ਦੇ ਸਾਹਮਣੇ ਨਾ ਫਿਰਿਆ ਕਰ ਬਾਹਰ ਤੂੰ ਇਹਨਾਂ ਦੇ ਸਾਹਮਣੇ ਨਾ ਹੱਸਿਆ ਕਰ ਸਤਗੁਰੂ ਅਰਿ ਸਿੰਘ ਮਹਾਰਾਜ ਜੀ ਸਤਿਗੁਰਾਂ ਦੇ ਵਿయోగ ਵਿੱਚ ਬੈਠੇ ਸੀ ਅੰਦਰ ਸਤਿਗੁਰਾਂ ਕੋਲ ਜਾ ਕੇ ਅਰਜ ਕੀਤੀ ਇਤਨਾ ਅਜ ਬਾੜ ਛਪਾਈਆਂ ਨੇ ਆਖਿਆ ਮੈਨੂੰ ਸੰਤਰੀ ਨੇ ਸਤਿਗੁਰੂ ਪ੍ਰਤਾਪ ਸਿੰਘ ਮਹਾਰਾਜ ਜੀ ਦੇ ਬਜੇ ਮਰਾ ਦੱਸੇ ਸਤਿਗੁਰੂ ਰੀਸ਼ ਸਿੰਘ ਮਹਾਰਾਜ ਜੀ ਵਿਜੋਗੀ ਹੋਏ ਆਖਿਆ ਜੀ ਨੂੰ